ਕਿ ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਾਇਆ ਸੱਚੇ પ્રેમ ਪਿਆਰ ਠੱਗਿਆ ਸੱਜਣਾ ਬੰਦੇ ਨੇ ਵਾਇ ਕੋਲ ਦੇ ਠੀਕ ਹੈ ਜੀ ਸੱਚ ਦੇ ਗਿਆਨ ਨਾਲ ਦੁਆਰ ਦਾ ਪਿਆਰ ਹੁੰਦਾ ਬਿਰਪ੍ਰੀਤਮ ਤੈਨੂੰ ਧਿਆਇਆ ਪ੍ਰੀਤਮ ਬਿਰਤ ਦੇ ਨਾਲ ਮਿਲ है, प्रेम प्यार ਨਾਲ ਮਿਲ ਕੇ ਤੈਨੂੰ ਧਿਆਇਆ ਹੈ ਜਿਨ੍ਹਾਂ ਦਾ ਧਿਆਨ ਕੋਇ ਹੁੰਦਾ ਕਵਾਲਿਕ ਚਿੱਤ ਹੋਏ ਹੁੰਦੇ ਨੇ ਜਿਹੜੇ ਸੱਚੇ ਪ੍ਰੇਮ ਪਿਆਰ ਸੱਚੇ ਵਿਚਾਰ ਪ੍ਰੇਮ ਜੇ ਆਪ ਮੇਲੇ ਕਰਤਾਰ ਉਹਨਾਂ ਨੇ ਆਪਣੇ ਮਨ ਨੂੰ ਆਪਣੇ ਬੰਦੂ ਵਾਲੇ ਬਣਾਇਆ ਬੋਲੀ ਇਹ ਤੇ ਮਨ ਬੋਲੀ ਬੋਲ ਬਗਾਨ ਮੁੰਦੀ ਬੰਦਾ ਆਪਣੀ ਬੰਦੂ ਬਨੂਦਾ ਕੋਈ ਨਹੀਂ ਬਣਾ ਸਕਦਾ ਉਹਨਾਂ ਦਾ ਸੁਚੋਣ ਸਾਡੇ ਕੋਲ ਹਥਿਆਰ ਹੈ ਇੱਕ ਗੁਰਬੰਦੀ ਦਾ ਜਿਹੜਾ ਗਿਆਨ ਹੈ ਇਹ ਦਲੀਲਾਂ ਚ ਲਈ ਬੰਦੂ ਬਨੂਦੇ ਸੁਬਨਾ ਥਲੇ ਇਹਦੇ ਲੀਲਾ ਜਾਂ ਸਾਡੇ ਕੋਲ ਜੀ ਸੌਖੇ ਬੰਦੂ ਬਣਾ ਲਿਆ ਫਿਰ ਕੋਈ ਨਾ ਗਿਆਨ ਰਹੀ ਸੀ ਜਾਨੀਆਂ ਗੱਲਾਂ ਨੂੰ ذلیسا مول بُد ਗਿਆ ਗੁਰ ਤੇ ਸ਼ਬਦ ਅਪਾਰ ਗੁਰ ਤੇ ਸ਼ਬਦ ਅਪਾਰ ਅਪਾਰ ਸ਼ਬਦ ਹੈ ਜੀ ਅਪਾਰ ਗਿਆਨ ਵੀ ਗੁਰ ਦਾ ਸ਼ਬਦ تیری مدد ਚਿੱਤ ਨੂੰ ਮਨਾਉਣਾ ਇਹ ਗੱਲ ਹੈ ਜੀ ਅੰਦਰ ਲੈ ਜਿੱਦੜੇ ਵੰਦੂ ਬਣ ਆਇਆ اچھا جی بھالਾ ਮਰ ਭਗਿਆ ਹੈ ਲੋਰదల تے پہلے ٹھیک ਹੈ ਭਾਲਾ ਹੀ ਬੰਦ ਕਰ ਕਰਦਾ ਮਾਇਆ ਨੂੰ ਦੇਖ ਜੀ ਇਹੋ ਗੁਦਿਨੇ ਹਰਮਾਨੇ ਦੁਆਲੇ ਦੁਆਲੇ ਠੀਕ ਹੈ ਜੀ ਇਹ ਸੱਜਣ ਮਿਲੇ ਨਾ ਵਿਛਣੇ ਜੇ ਆਪ ਮਿਲੇ ਕਰਤਾਰ ਐਸਾ ਵਸਾ ਸੱਜਣ ਜੇ ਬਿਰਜਲ ਫੇਲੀ ਵਿਛਣਦੇ ਹੁੰਦੇ ਆਪੇ ਮਿਲੇ ਨਾਲ ਮਿਲੇ ਤਾਂ ਵਿਛੜੇ ਨਹੀਂ ਸਕਦੇ ਅੱਛਾ ਇਹ ਸੱਜਣ ਉਹ ਹੈ ਜਿਨ੍ਹਾਂ ਦਾ ਮਨ ਚ ਟਿਕ ਸੱਜਣ ਕਹਿੰਦੇ ਸੋਹਣ ਜੱਲ ਅੱਛਾ ਸੋਹਣ ਲਿਆ ਜੀ ਠੀਕ ਹੈ ਜੀ इकना दर्शन की प्रतीति न आईआ शब्द न करे विचार बिछड़ियां का क्या बिछड़ है जिना दूजे पाए प्यार दर्शन की प्रतीति न आईआ एकन दर्शन भरोसा ही नहीं होया होवे ता प्रतीति दर्शन होवे ता प्रतीति होवे शब्द न करे विचार विचार नहीं करदे दर्शन में अखानो दूर ते दर्शन ते का क्या बिछड़ है ਜਿਨ੍ਹਾਂ ਦੂਜੇ ਪਾਇ ਪਿਆਰ ਵਿਛੜਿਆ ਜਿਹੜੇ ਪਹਿਲਾਂ ਹੀ ਵਿਛੜੇ ਹੋਏ ਨੇ ਵਿਛੜਿਆ ਦਾ ਕੀ ਵਿਛੜਾ ਠੀਕ ਹੈ ਵਿਛੜਿਆ ਦਾ ਕੀ ਵਿਛੜਣ ਜਿਹੜੇ ਪਹਿਲਾਂ ਵਿਛੜੇ ਨੇ ਉਹਨਾਂ ਦਾ ਵਿਛੜਾ ਜਿਹਨਾਂ ਦੂਜੇ ਪਾਇ ਪਿਆਰ ਹੁਣ ਰੋੜ ਦਾ ਪਿਆਰ ਮਾਇਆ ਨਾਲ ਉਹ ਪਹਿਲੇ ਵਿਛੜੇ ਨੂੰ ਮਾਇਆ ਨਾਲ ਖੜੇ ਨੇ ਸੱਚ ਨਾਲ ਖੜੇ ਨੇ ਝੂਠ ਨਾਲ ਖੜੇ ਨੇ ਜਿਹੜੇ ਖੜੇ ਝੂਠ ਨਾਲ ਨੇ ਤਾਂ ਸੱਚ ਨੂੰ ਪਹਿਲੇ ਵਿਛੜ ਠੀਕ ਹੈ ਮਨਮੁਖ ਸੇਤੀ ਦੋਸਤੀ ਥੋੜ੍ਹਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਣਾ ਹੋਈ ਇਤ ਦੋਸਤੀ ਚਲਣ ਵਿਕਾਰ ਜਾਲਮੁਖਾ ਦੀ ਜਿਹੜੀ ਦੋਸਤੀ ਥੋੜੇ ਦਿਨ ਦੇਰ ਨਹੀਂ ਜਾ ਸਕਦੀ ਅੱਛਾ ਮਨਮੁਖਾ ਛੇਤੀ ਦੋਸਤੀ ਥੋੜ੍ਹਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਣਾ ਹੋ ਗਈ ਇਤ ਦੋਸਤੀ ਚੱਲਣ ਵਿਕਾਰ ਇਹ ਦੋਸਤੀ ਦੇ ਵਿੱਚ ਵਿਕਾਰ ਚੱਲ ਜਾਂਦੇ ਨੇ ਇਹ ਦੋਸਤੀ ਦੇ ਵਿੱਚ ਵਕਾਰ ਚੱਲੇ ਜਾਂਦਾ ਹੈ ਲੋਭ ਚੱਲੇ ਜਾਂਦਾ ਹੈ ਮੋਹ ਚੱਲੇ ਜਾਂਦਾ ਹੈ ਕਰੋਧ ਚੱਲੇ ਜਾਂਦਾ ਹੈ ਇਸ ਕਰਕੇ ਦੋਸਤੀ ਉਮਰ ਹੀ ਨਹੀਂ ਅੰਦਰ ਸੱਚੇ ਜੇ ਆਪ ਭੁਲਾਏ ਕਰਤਾਰ ਕਹਿੰਦਾ ਇਹਨਾਂ ਦੇ ਅੰਦਰ ਸੱਚੇ ਦਾ ਭੋਰੀ ਸੱਚੇ ਦਾ ਰਹਿਣੀ ਵਾਹੀ ਨਾਮ ਕੋ ਕਰੇ ਪਿਆਰ ਮਨੁੱਖ ਦੇ ਨਾਲ ਪਿਆਰ ਤੇ ਉਹਨਾਂ ਨੂੰ ਦੋਸਤੀ ਕੀ ਕਰਦੀ ਕੀ ਫਾਇਦਾ ਸਾਕੀ ਜੇ ਦੋਸਤੀ ਜੇ ਆਪ ਬੁਲਾਏ ਕਰਤਾਰ ਉਹ ਤਾਂ ਕੋਲ ਆਉਣ ਨੂੰ ਮਦਦ ਕਰਨ ਵਾਸਤੇ ਦਾ ਰਾਹ ਹੀ ਲੈਣ ਵਾਸਤੇ ਤਾਂ ਬੈਠ ਜਾਈਦਾ ਉਹਨਾਂ ਨਾਲ ਹਰ ਵਕਤ ਬੈਠਣ ਦੀ ਲੋੜ ਨਹੀਂ ਠੀਕ ਹੈ ਜੀ ਬੇਦੀਨਾ ਕੀ ਦੋਸਤੀ ਬੇਦੀਨਾ ਦਾ ਖਾਨਾ ਓ ਜੀ ਹਾਂ ਜੀ ਮਹੱਲਾ ਤੀਜਾ ਇਕ ਸਦਾ ਇਕੱਤੇ ਰੰਗ ਰਹੈ ਤਿਨ ਕੇ ਹਉ ਸਦ ਬਲਹਾਰੇ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗਉ ਪਾਈ ਏ ਗੁਰਮੁਖ ਦੇ ਇੱਕ ਸਦਾ ਇਕੱਤੇ ਰੰਗ ਰਹੈ ਰੰਗ ਦੇ ਵਿੱਚ ਰਹਿੰਦੇ ਨੇ ਰੰਗ ਦੇ ਵਿੱਚ ਰਹਿੰਦੇ ਦੇ ਉਹਨਾਂ ਨੇ ਕਿਹੜੇ ਆ ਸਕਦਾ ਇਹ ਕਿ ਆਹ ਜਾਂ ਮੈਂ ਆਹ ਸਤਬਲਿਆਰੇ ਜਾਂਦੋ ਸਮਾਨ ਤਾਂ ਅਰਪੇ ਮਿਲ ਕੋ ਜੀਵਨ ਬਿਲਾ ਕੁਪਾਇ ਮੈਂ ਦੇ ਤੇ ਅਲਫਰਤਾ ਬੀਬੀ ਆਪਣੇ ਤਾਲ ਨੂੰ ਦੀਵਾ ਘਰ ਤੇ ਬੰਦੂ ਦੀਵਾ ਘਰ ਤੇ ਦੀ ਛੜੂ ਗਿਆ ਹਾਂਜੀ ਤਿੰਨ ਮੇਲਿਆਂ ਮਨ ਸੰਤੋਖੀ ਹੈ ਕ੍ਰਿਸ਼ਨ ਆ ਭੁੱਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਈ ਉਹਨੇ ਬਣਾ ਕਰਕੇ ਦੇ ਬਗਾਵਨਾ ਲੋਕ ਨੂੰ ਤੋਂ ਰੰਗ ਦੇ ਰਾਮ ਚਰਨ ਦੇ ਉੱਤੇ ਸਦਾ ਸੁਖੀ ਹੋ ਜਾਂਦੇ ਨੇ ਪਰ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ ਸੱਚੇ ਸੰਦੇਵ ਲਾਏ ਸਾਚ ਨਾਲ ਉਹਨਾਂ ਦੀ ਲੈਵ ਲੱਗ ਜਾਂਦੀ ਹੈ ਹਾਂਜੀ ਪੌੜੀ ਤਿਸ ਕੋ ਹਉ ਜਿਨ ਹਰ ਕੋ ਸਦ ਬਲਹਾਰਣਾ ਜਿਨ ਸੇਵਾ ਬਣਤ ਬਣਾਈ ਉਸ ਗੁਰਦੇਵ ਨੂੰ ਮੈਂ ਗੁਰ ਤੋਂ ਵਾਰਿਆ ਜਿਸੇ ਮੈਨੂੰ ਹਰ ਹਰ ਕਥਾ ਸੁਣਾਈ ਹੈ ਹਰ ਤਾਂ ਮੇਲਾਕਾਰ ਹੈ ਕਥਾ ਵੀ ਮੇਲਾਕਾਰ ਹੈ ਕਥਾ ਮੇਲਾਕਾਰ ਤੋਂ ਕੀ ਬਾਵਾ ਜੀ ਵਾਯਾ ਦੇ ਲਿਪਤ ਪਥਾ ਦੇ ਵਿੱਚ ਵੀ ਹੈ ਵਾਇਆ ਅਡੋ ਅਡ ਕਦੀ ਜਾਂਦੀ ਹੈ ਸਥਾ ਦੇ ਵਿੱਚ ਇਸ ਗੁਰ ਕੋ ਸਤ ਬਲਹਾਰਣਾ ਜਿਨ ਹਰ ਸੇਵਾ ਬਣ ਤੋ ਗੁਰ ਕੋ ਸਤ ਉਹ ਸਤਗੁਰ ਪਿਆਰਾ ਜੀ ਜਿਹੜੇ ਬਣ ਬਣੇ ਉਹ ਵੀ ਮੇਰੇ ਨਾਲ ਹੀ ਹੈ। 'ਤੇ ਬਿਰੂ ਲਾਇ ਕਿ ਵੀ ਉੱਥੇ ਵੀ। ਠੀਕ ਦਾ ਭਾਵ ਕੀ ਹੈ ਜੀ ਕਿ ਉਹ ਜਿਹੜਾ ਮੈਨੂੰ ਗਿਆਨ ਦਿੰਦਾ। ਬੁੱਧੀ ਬੋਲਦੀ ਹੈ ਬੁੱਧੀ ਉਹ ਹੋ ਗਿਆ ਉਹ। ਗੁਰ ਕੋ ਸ਼ਾਬਾਸ਼ ਹੈ ਸੋਜੀ ਭਾਈ ਸੋਜੀ ਤਾਂ ਗੋਲੂ ਉਹ ਆਪਣੀ ਪਾਲੀ ਸੋਜੀ ਉਹ ਤਾਂ ਸੋਜੀ ਸਾਨੂੰ ਮਿਲ ਗਈ ਅਸੀਂ ਤਾਂ ਕਿਤੇ ਨਾ ਕਿਤੇ ਬੋਲਣ ਲੱਗੇ ਭੁੱਲ ਭੁਲਖਣ ਕਰਦਿਆਂ ਵੀ ਉਹ ਭੁੱਲ ਕਰ ਦਿੰਦਾ ਫਿਰ ਠੀਕ ਹੈ ਜੀ ਨਾਨਕ ਗੁਰ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਾ ਪ੍ਰਵਾਨ ਅਗਰ ਕਾ ਗੁਰੂ ਬਿਟੂ ਐਸੇ ਬਿਟੂ ਅਸੇ ਮੇਰੀ ਮੰਡੀ ਆਸਾ ਪੂਰੀ ਕਰਤੀ ਹਰ ਰੋ ਦੇਕੇ ਅੱਛਾ ਨਾਨਕ ਗੁਰ ਬਿਟੂ ਲਿਖਿਆ ਜੀ ਗੁਰ ਬਿਟੂ ਤੋਂ ਕੀ ਭਾਵ ਗਿਆਨ ਵਿੱਚ ਅੱਛਾ ਅੱਛਾ ਜੀ ਬਾਰੇ ਜਿਨ ਹਰ ਨਾਮ ਦਿਆ ਦਿਆ ਹਰ ਅੱਛਾ ਜੀ ਖਾਬ ਦਿੱਤਾ ਆ ਗਿਆ ਨਾ ਤੇ ਵਾਲਾ ਅਤੇ ਇਹ ਕਿਹੜੇ ਕਿਹੜੀ ਸਟੇਜ ਦੀ ਗੱਲ ਹੈ ਜੇ ਦੋ ਪਦਾਰਥ ਮਿਲੇ ਹਨ ਜੀ ਹਰਨਾਮ ਦੀ ਆ ਦੋ ਪਦਾਰਥਾਂ ਦੀ ਉਹ ਗੱਲ ਹੈ ਜੀ আচ্ছা ਮੇਰੇ ਮਨ ਕੀ ਆਸ ਪੁਰਾਈ ਬੁਰੀ ਹੋ ਗਈ ਸਭੇ ਆਸਾ ਬੁਰੀ ਪਾਇਆ ਤਾਂ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ